जे जयप्रसाद पाठ पटंबर हटावे किसे त्याग कद अवर लुभावे आजी रे ना फटदे रेशमी कपड़े जे जयप्रसाद पाठ पटंबर रेशमी कपड़े है ना होना औरो छड़ के और कदे लोग और कदे तरह फंदा होरे तो तनु बढ़िया कपड़े भी छड़ता ता और कदे लोग दी पूर्ति ए तो बढ़िया कपड़ा ही नहीं और ਕਿ ਲੈ ਜਾਂਦੇ ਹੋਰ ਪੋਰਟ ਤੇ ਉਹ ਜਾਵਦੇ ਕੋਈ ਨਹੀਂ ਦੋਵਾਂ ਦੀਆਂ ਚੀਜ਼ ਹੋਵੇ ਪਾਟ ਨੰਬਰ ਜੇ ਬਾਹਰ ਲੈ ਲਈ ਪਾਟ ਨੰਬਰ ਬਾਹਰ ਲੈ ਨਹੀਂ ਹੁੰਦੇ ਪਾਟ ਬਟਮਰ ਹੁੰਦਾ ਹੀ ਹੱਦ ਲੈਂਦੇ ਸਰ ਪਾਟ ਪੱਟ ਉੱਬਰ ਇਹ ਲੱਭਦਾ ਉੱਬਰ ਹੁੰਦਾ ਆਕਾਸ਼ ਪੱਟ ਹੁੰਦਾ ਬਰੀਕ ਕਪੜਾ ਬਹੁਤ ਬਰੀਕ ਚਲ ਰੜਕੇ ਰੋ ਉਹ ਜਿਹੜੀ ਸਾੜੀ ਸੀ ਨਾ ਜੋਬ ਜੀ ਨੂੰ ਦਿੱਤੀ ਅਬਰ ਸੀ ਉੱਪਰ ਦੇ ਤੋਂ ਵਾਰ ਗਏ ਆਬਰ ਦੇ ਆਵਾਰ ਉਹ ਸਾਰਾ ਉੱਪਰ ਲੈ ਦਾ ਉੱਪਰ ਆਕਾਸ਼ੇ ਦਾ ਗਹਿਣ ਦੇਤਾ ਪ੍ਰਗਿਆ ਮਨ ਪਰਗਾਸ ਜਿਹੜਾ ਧਾਰੂ ਪਰੋ ਉਹ ਥਲੇ ਅਗਿਆਨਤਾ ਪਰਮ ਸ਼ਰਮ ਸਭ ਢੱਕਦੀ ਤਾਰੇ ਉਹ ਗੁਣ ਉਹ ਤੇ ਜੋ ਅਗਿਆਨਤਾ ਸੀ ਜਦੋਂ ਉਹੀ ਨਹੀਂ ਰਹੀ ਉਹ ਗੁਣ ਬਣੀ ਰਹੇ ਇਹ ਪਾਟ ਪਟਬਰ ਹੰਡਾ ਆਵੇ ਪਹਿਲਾ ਪਾਟ ਪਟਬਰ ਵੀ ਹੈ ਅਜਿਹਾ ਸੀ ਬਰੀ ਕਪੜਾ ਰੇਸ਼ਮ ਦਾ ਉਹਨੂੰ ਕਿਹਾ ਜੇ ਪ੍ਰਸਾਦ ਪਾਟ ਪਟਬਰ ਹੰਡਾ ਜਿਹੜਾ ਗੁਰਮੁਖਾ ਦਾ ਪਾਟ ਪਟਬਰ ਹੈ ਉਹ ਧੂਆ ਅੱਜ ਤਾਂ ਇਹ ਸਰੀਰ ਦਾ ਬਾਹਲਾ ਕੱਪੜਾ ਨੂੰ ਬਾਹਲਾ ਕੱਪੜਾ ਛੱਡਣ ਤੋਂ ਪਹਿਲਾਂ ਅੰਦਰ ਕੱਪੜਾ ਚਾਹੀਦਾ। ਸਹੀ ਤਾਂ ਲੰਗੇ ਆਉਣ ਲੱਗੇ ਜਾਣ ਦੁੱਖਾ ਫਿਰ। ਜਦ ਬਾਟ ਪਟੰਬਰ ਇਹਨੂੰ ਮਿਲ ਜਾਂਦਾ ਫਿਰ ਬਾਹਲਾ ਕੱਪੜਾ ਲਾਉਂਦਾ। ਜਾਂ ਥੱਲੇ ਬਿਲਕੁਲ ਠੀਕ ਹੁੰਦਾ ਨਾ ਆ ਜਾਂਦਾ ਸਾਡਾ ਜ਼ਖਮ ਠੀਕ ਹੋ ਕੇ ਤੋਪਲਾ ਫਿਰ ਲੈ ਜਾਂਦਾ ਅਗਲਾ ਲੈ ਜਾਂਦਾ ਹੁੰਦਾ ਹੱਲੇ ਜਾਲੀਏ ਜਾਣ ਜਾਈਦਾ ਉਹ ਨਾਲ ਦਾ ਆਉਂਦਾ ਲਾਉਂਦੇ ਤੂੰ ਸਮਾਂ ਹਾਂ ਆਓ ਕੱਜ ਨੂੰ ਵੀ ਬੈਠਾ ਸੁਖੀ ਲੱਗਦਾ ਹੈ ਜੇ ਤਾਂ ਦੇਖਦਾ ਰਹਿੰਦਾ ਵੀ ਹੁਣ ਛੇਤੀ ਰਹਿ ਜਾ ਚੰਗਾ ਹੋ ਜੀ ਜੇ ਪ੍ਰਸਾਦ ਪਟ ਪਟੰਬਰ ਹਟਾਵੇ ਕਿਸੇ ਤਿਆਗ ਕਰਤਾ ਕੋਈ ਪਟੰਬਰ ਹਟਾਣਾ ਕਿੰਨੀ ਔਖੀ ਗੱਲ ਐ ਜੇ ਪਟ ਜਿਤ ਪਟ ਅੰਦਰ ਤਖੋ ਜਨ ਪਟ ਅੰਦਰ ਬਾਹਰ ਗੋਦੜ ਬਾਹਰ ਚ ਹੈ ਖਤਰੇ ਹੋਵੇ ਇਸੀ ਤੇ ਭਲੇ ਸੰਸਾਰ ਇਹ ਅੰਦਰ ਪੱਟ ਹੋ ਗਿਆ ਰੇ ਸ਼ਬਾ ਬੁਲਾਇਆ ਇਹਨੂੰ ਚੁਬਦਾ ਨਹੀਂ ਖੁਰਦਾ ਨਹੀਂ ਬਾਹਰ ਕੋਤਲ ਬਾਹਰ ਸਰੀਰ ਦਸ ਗਿਆ ਤੇ ਭਲੇ ਸੰਸਾਰ ਚਾਦੋ ਕਪੜਾ ਮਿਲ ਜਾਂਦਾ ਅੱਦਲਾ ਬਾਟ ਫਿਰ ਬਾਹਰ ਲੈ ਕੇ ਲੋੜ ਜੀ ਹੈ ਬਾਹਲਾ ਕਪੜਾ ਉਦੋਂ ਸੀ ਲੋੜ ਹੈ ਜੋ ਤੱਕਰ ਮਿਲਿਆ ਆ ਜੀ ਕਿਸੇ ਤਿਆਗ ਕਾ ਦਾ ਅਵਰ ਲਵਾਵਾ ਇਹਨੂੰ ਝੱਟ ਕੇ ਤੂੰ ਕਿੱਥੇ ਹੋਰ ਕਿਥੀ ਤੋਂ ਲੋ ਪੂਰਾ ਕਰਦਾ ਫਿਰਦਾ ਤੂੰ ਆ ਜਿਹੜਾ ਫਿਰਦਾ ਨਾ ਤੂੰ ਆ ਨੁਭਾਵੇਂ ਕਬਰਾਂ ਤੇ ਕਬਰਾਂ ਦੇ ਦੁਰਿਆ ਫਿਰਦਾ ਜਿਹੜਾ ਕਦੇ ਕਿਤੇ ਕਦੇ ਕਿਤੇ ਹਿੰਕੁੰਡ ਜਾਂਦਾ ਕੋਈ ਕੋਲ ਜਾਂਦਾ ਕੋਈ 베ਰੀ ਨੂੰ ਕੋਈ ਕਿਤੇ ਉਹ ਕਹਣਾ ਵੀ ਕਿੱਥੇ ਤੂੰ ਤਰੇਵਾਂ ਤਾਂ ਝੱਡ ਗਏ ਉਹ ਸਵਾਲ ਹੈ ਉਹ ਕਿੱਥੇ ਹੈ ਉਹ ਮਨ ਅੰਦਰ ਹੈ ਜੀ ਦੀ ਕਿਰਪਾ ਦੀ ਗੱਲ ਕਰਨੀ ਜਾ ਰਹੀ ਹੈ ਜੀ ਦੀ ਕਿਰਪਾ ਉਹ ਕਿੱਥੇ ਹੈ ਉਹ ਮਨ ਦੇ ਅੰਦਰ ਹੈ ਫਿਰ ਜੋ ਆ ਸਿਸਟਮ ਸਾਡਾ ਅੱਜ ਹੈ ਬਾਹਰ ਇਥੇ ਡੋੜਦੇ ਨੇ ਫੁੱਟ ਜਾਂਦੇ ਨੇ ਇਹੀ ਗੁਰਮੱਤ ਦੇ ਜਦੋਂ ਦਾ ਇਹ ਸਿਸਟਮ ਬੜੇ ਗੁਰਦਾਰੇ ਬਣੇ ਨੇ ਇਤਿਹਾਸਕ ਜੋ ਵੀ ਇਹਨਾਂ ਨੇ ਬਹੰਦੇ ਬਣਾਏ ਦੇ। ਵਿਚਾਦਿਓ। ਇਹ ਅਸਲ 'ਚ ਗੁਰਮਤ ਦੁਨੀਆਂ ਨੂੰ ਰੌਣਕਾਂ ਦਿੱਤੀ। ਸਬੂਤ ਅਸਾਟ ਕੋਲ ਸਾਰਾ ਇਹ ਨਾਸ ਕਰਨਾ ਪਊਗਾ। ਚਲੋ। ਹੋਜੀ। ਜੇ ਆ ਪ੍ਰਚਾਰ ਕਰ ਨਾਲ ਜੀ ਗੁਰਗੋਆਂ ਜਿੱਥੇ ਗੁਰਗੋਆਂ ਜੀ ਮੰਤਾ ਖਾਦਮ ਉਹ ਬੋਲਦਾ ਤਾਂ ਕਰਦੇ ਨੇ ਵੀ ਮੰਤਾ ਖਾਦਮ وہی ਉਹ ਜਿਹੜੇ ਇਹ ਰਹਿਣਾ ਬੈਠੇ 50-50 ਹਜ਼ਾਰ ਚਰਚਾ ਲੈਦੇ ਇਹਨਾਂ ਦੀ ਇਹਨਾਂ ਨੂੰ ਆਪਣਾ ਰਹਿ ਵੀ ਸਾਡੀ ਲੋੜ ਨਹੀਂ ਸਵਾਲ ਉਹਨਾਂ ਨੂੰ ਆਪਣੀ ਲੋਜੀ ਰੋਟੀ ਦਾ ਸਵਾਲ ਹੋ ਕਸਦ ਸਾਡੀ ਕੀ ਲੋੜ ਹੈ ਜੇ ਗੁਰਦਾਨੇ ਨਹੀਂ ਆਖ ਉੱਠੀਂ ਬੋਲਦਾ ਹੈ ਅਸਾਂ ਕਹਦੀ ਬੋਲਦਾ ਤਾਹੀ ਉਹਨਾਂ ਦੀ ਲੋੜ ਹੈ ਜੇ ਉਹਦੀ ਮੰਨਤਾ ਨਹੀਂ ਉਹਦੀ ਮੰਨਤਾ ਕਰਕੇ ਇਹਨਾਂ ਦੀ ਮੰਨਤਾ ਹੋ ਜੇ ਉਹਨਾਂ ਲਈ ਕਰਾਉਣ ਨੂੰ ਦੇ ਜੋ ਜੇ ਪ੍ਰਸਾਦ ਸੁਖ ਤੇਜ ਸੁਈਜੇ ਮਨ ਆਖ ਪਹਿਰ ਤਾਕਾ ਜਸ ਗੋਬੀਜੇ ਜੇ ਪ੍ਰਸਾਦ ਸੁਖ ਤੇਜ ਸੁਈਜੇ ਜੀ ਦੀ ਕਿਰਪਾ ਨਾਲ ਸੁੱਖ ਦੀ ਨੀਂਦ ਸੌਂਦੇ ਤੂੰ ਸੇਜੇ ਹਿਰਦੇ ਨੂੰ ਕਹਾ ਹੋਇਆ ਇੱਥੇ ਜੇ ਸੌਂਦਾ ਹਿਰਦੇ ਜਉਂਦਾ ਬਾਹ ਦੀ ਉੱਤੇ ਹੂੰ ਆਹੋ ਸੁੱਤਾ ਬੈ ਨਹੀਂ ਬਾਹੋਂ ਸੌਂਦਾ ਜੀ ਸੇਛੀ ਹੋਈ ਜਾਂਦਾ ਸਭ ਤੋਂ ਵੀ ਹੁੰਦਾ ਬਾਲੀ ਦਾ ਸਹੀ ਰ ਹੈ ਬਾਲੀ ਇਹ ਸਹੀ ਰੱਖਿਆ ਹੈ ਕਿ ਤੇ ਰੱਖਦਾ ਦਾ ਕੀ ਬਾਲੇ ਕਾ ਚਾਹੇ ਸੂੜਾ ਦੇ ਵੀ ਪਿਆ ਹੋਵੇ ਬੇਹੋਸ਼ ਪਿਆ ਜੇ ਉਹ ਉਤਸ਼ੇਤ ਸੁਖਣਾਲੇ ਪਿਆ ਜਦ ਵੀ ਸੁੱਤਾ ਪਿਆ ਉੱਠਦਾ ਸੁਖਣਾਲੇ ਉੱਠਦਾ ਕੋਈ ਫਰਕ ਨਹੀਂ ਪੈਂਦਾ ਵਧੀਆ ਬੈਸਰੇ ਤੇ ਪਿਆ ਜਾਂ ਘਟਿਆ ਤੇ ਪਿਆ ਤਾਂ ਵਧੀਆ ਨੀਂਦ ਹੋਣੀ ਚਾਹੀਦੀ ਹੈ ਵਧੀਆ ਹੋਣੀ ਚਾਹੀਦੀ ਹੈ ਜੇ ਵਧੀਆ ਨੀਂਦ ਲਈ ਕਹੇ ਵਧੀਆ ਜਗਾ ਮੈਂ ਸੁਖ ਨਾਲ ਸੁਤਾ ਪਿਆ ਜਿੱਥੇ ਮਨ ਆਠ ਪਹਿਰ ਤਾਕਾ ਵਿੱਚ ਸੁੱਖ ਹੈ ਹਿਰਦੇ ਵਿੱਚ ਉਹ ਸੇਜੇ ਸੁੱਖ ਹੈ ਜਰ ਜੋਈ ਸੇਜੇ ਸੁਖਦਾਇਕ ਹੈ ਜਿਹੜੇ ਜਗਾ ਉਹ ਉਹੀ ਸੇਜੇ ਜ ਆਠ ਮਨ ਆਠ ਪਹਿਰ ਦਾਗਾ ਜਸਕਾ ਵਿੱਚ ਬਾਅਦ ਆਠ ਪਹਿਰ ਤਾਕਾ ਜਸਕਾ ਵਿੱਚ ਅੱਠੇ ਪਹਿਰ ਉਹਦਾ ਜਸਕਾ ਅੰਦਰ ਜਦ ਲੋਕਾਂ ਦੀ ਆਮ ਲੋਕਾਂ ਦੀ ਤਾਰ ਜਿਹੜੇ ਸਾਡੇ ਕੋਲ ਹੈ ਨਾ ਸੁਖ ਸੁਖਦਾ ਉਹ ਪਰਮੇਸ਼ਰ ਦੀ ਦੇਣ ਹੈ ਫਸਲ ਜੋ ਉਹਨਾਂ ਨੂੰ ਇਸੇ ਤਰੀਕੇ ਨਾਲ ਦਿੰਦਾ ਉਹਦੇ ਕਹਿੰਦੇ ਇਸ ਤਰੀਕੇ ਉਹਨਾਂ ਲੋਕਾਂ ਦਾ ਇਸ ਤਰੀਕੇ ਨਾਲ ਵੀ ਜੀ ਦੀ ਕਸਬਾਨਾ ਤੋਂ ਕਹਿੰਦੇ ਵੀ ਭਾਈ ਉਹਦੀ ਕੀ ਦਰਵਾਹ ਹੋਈ ਹੈ ਪਰਮੇਸ਼ਰ ਦੀ ਸਾਰੇ ਪਰਿਵਾਰ ਹੈ ਇਹ ਹੈ ਉਹ ਹੈ ਮੌਜ ਕਰਦੇ ਹਾਂ ਠੀਕ ਹੈ ਸਾਰੇ ਸੁੱਖ ਸੁਖਦਾਵਾਂ ਹੈਗੀਆਂ ਨੇ ਫਿਰ ਉਹਦਾ ਜਸ ਕਿਉਂ ਨਹੀਂ ਗਾਉਣਾ ਇਹਦਾ ਜਸ ਗਾਉਣਾ ਕਿ ਇਹ ਜੀਵਾਂ ਹੁਣਾਂ ਦਿੱਤੀਆਂ ਨੇ ਦੂ ਸਾਰਿਆਂ ਨੂੰ ਉਹ ਦਿੰਦਾ ਜਿਹੜਾ ਸਾਰਿਆਂ ਨੂੰ ਦਿੰਦਾ ਉਹ ਹੈ ਜੇ ਆਪਾਂ ਇੱਕ ਗੱਲ ਮੰਨ ਲਈਏ ਵੀ ਸਾਰਿਆਂ ਨੂੰ ਉਹ ਦਿੰਦਾ ਹੈ ਮੁਸਲਮਾਨਾਂ ਨੂੰ ਉਹ ਹੀ ਦਿੰਦਾ ਹੈ ਉਹ ਕਹਿੰਦਾ ਹੁਮਦਦਾਰੀ ਸਾਰਿਆਂ ਨੂੰ ਵੀ ਦਿੰਦਾ ਉਹ ਕਹਿੰਦਾ ਹੁਮਦਦਾਰੀ ਤੂੰ ਕਹਿੰਦਾ ਹੁਦੂਬਦਾਰ ਸਾਰੇ ਗੱਲ ਤੋਂ ਜਿੱਤਾ ਇੱਕ ਹੈ ਤੁਹਾਡਾ ਅਪਸ ਵਿੱਚ ਜਗ ਲੱਗ ਗਿਆ ਸਾਰੇ ਮੰਡਲ ਵੀ ਦਿੰਦਾ ਇੱਕ ਹੈ ਤੁਸੀਂ ਕਹਿੰਦੇ ਹੋ ਰੂਗਾ ਨਾ ਕਹਿੰਦੇ ਹੋ ਰੂਗਾ ਨਾ ਕਹਿੰਦੇ ਹੋ ਰੂਗਾ ਨਾ ਕਹਿੰਦੇ ਹੋ ਆ ਉਹ ਲੱਭ ਪਾਉਂਦੇ ਇਥੇ ਕਿਉਂਕਿ ਇਹਦਾ ਸਹੀ ਕਿਹਾ ਜਨਰਲ ਕਿਸੇ ਵੀ ਆਦਮੀ ਨੂੰ ਕਹਾਂ ਹੈ ਫਿਰ ਇੱਕ ਮਤ ਹੈਗੇ ਨੇ ਇਹਦੇ ਇੱਕ ਮਤ ਸੇ ਜੀਉਂਦੀ ਜੇ ਇੱਕ ਮਤ ਨਹੀਂ ਹੈ ਤਾਂ ਅਸੀਂ ਗਲਤ ਆਦਮੀ ਉਹ ਜਿਹੜੇ ਜਿਹੜੇ ਦੇ ਰਹੇ ਨੇ ਉਹ ਸਾਡੇ ਠੀਕ ਨਹੀਂ ਉਹ ਕਹਿੰਦਾ ਖੁਦਾ ਦਿੰਦਾ ਉਹ ਕਹਿੰਦਾ ਬਹਿਰੂ ਦਿੰਦਾ ਖੁਦਾ ਇਹਨਾਂ ਦਾ ਹੋਰ ਹੈ ਉਹ ਕਹਿੰਦਾ ਰਾਮ ਦਿੰਦਾ ਕੋਈ ਕਹਿੰਦਾ ਸ਼ਿਸ਼ਣ ਦਿੰਦਾ ਕੋਈ ਕਹਿੰਦਾ ਬਿਸ਼ੂ ਦਿੰਦਾ ਕੋਈ ਕਹਿੰਦਾ ਸ਼ੇਬ ਦਿੰਦਾ ਕੋਈ ਕਹਿੰਦਾ ਇਸ਼ਾ ਦਿੰਦਾ ਫੇਰ ਤਾਂ ਡਿਫਰੈਂਟ ਹੋ ਗਿਆ ਸਾਡੇ ਦਿੱਤਾ ਇੱਕ ਇਹ ਚਾਲੇ ਗਿਆ ਨਾ ਇਹ ਸਾਈ ਸਾਰੀ ਦੁਨੀਆ ਦੁਨੀਆ ਉਹ ਇਹ ਕਹਿੰਦੇ ਨੇ ਮੁਸਲਮਾਨ ਨੇ ਇਹ ਕੋਹ ਕੋਹ ਦੇ ਸਾਰੀ ਦੁਨੀਆ ਦੁਨੀਆ ਅਸੀਂ ਕਹਿੰਦੇ ਰਾਮ ਨੇ ਸਾਰੀ ਦੁਨੀਆ ਦੁਨੀਆ ਇਹ ਝਗੜਾ ਸਾਡਾ ਕੋਆ ਹੋਇਆ ਹੋਇਆ ਉਹ ਇੱਕੋ ਹੀ ਆ ਅਸਲ ਜਿਹਦਾ ਪਤਾ ਹੀ ਨਹੀਂ ਕਿਸੇ ਨੂੰ ਹਾਂ ਇੱਕ ਗੱਲ ਤੇ ਅਸੀਂ ਇੱਕ ਗੱਲ ਤੇ ਸਹਿਬਤ ਵੀ ਹੈਗੀਆਂ ਅਸੀਂ ਸਾਰੇ ਜੋ ਦਵਦੇ ਅੰਦਰ ਇਹ ਗੱਲ ਤੇ ਸਹਿਮਤ ਹ ਇਸਾਈ ਵੀ ਸਹਿਮਤ ਨੇ ਮੁਸਲਮਾਨ ਵੀ ਸਹਿਮਤ ਨੇ ਹਿੰਦੂ ਵੀ ਸਹਿ ਕੋ ਜੋ ਵੀ ਸਾਰੇ ਜੋ ਵੀ ਸਦੇ ਅਸੀ ਸਾਰੇ ਸਹਿਮਤ ਨੇ ਤੇ ਉਹੀ ਗੁਰਬਾਣੀ ਦੇ ਗਿਆ ਜਿ세 ਤੇ ਸਦਾ ਮਨੁਨੁਨ ਅਰਸ ਉਹਦੇ ਤੇ ਬਹੁਤ ਲਾਭ ਦੀਆਂ ਗੱਲਾਂ ਸੱਚੀਆਂ ਸਭ ਦੀ ਬਾਹਰਲੇ ਨੂੰ ਛੱਡੋ ਸਾਰੇ ਮਰਦਾਂ ਨੂੰ ਵੀ ਆਪਣੇ ਮਨ ਅੰਦਰ ਵਾਲੀ ਸਾਰਿਆਂ ਨੇ ਸਾਰਿਆਂ ਨੇ ਬੰਧਿਆ ਵੀ ਅੱਧਰ ਉਹ ਗੱਲ ਨੂੰ ਸੱਚੀ ਮੰਨ ਕੇ ਗੁਰਮਤਿ ਦੇ ਮੋਹ ਲਾਤੀ ਫਿਰ ਪਜਗੜਾ ਪਾਇਦਾ ਚਾਹਵੇਂ ਅਸੀਂ ਬੈਠਣਾ ਹੈ ਜਿਸ ਕਛੰਦੀ ਟੇਬਲ ਤੇ ਤਾਂ ਉਹ ਆ ਗਏ ਵੀ ਆ ਤੁਸੀਂ ਮੰਨਦੇ ਹੋ ਉੱਤਰ ਅੱਲਾਹੁ ਅ ਸਾਡੇ ਕੋਲ ਆ ਗਈ ਆ ਅਸਪਦੀ ਰਾਏ ਤੋਂ ਇਹ ਤਾਂ ਸਭੀ ਤੁਸੀਂ ਦੱਸੋ ਕੀ ਤਰਾਜਾ ਸਭ ਹੁਣ ਇਹ ਤਾਂ ਕਹਿ ਨਹੀਂ ਸਕਦਾ ਅੰਦਰ ਹੈ ਨਹੀਂ ਤੁਰ ਕਲ ਕਲ ਨੇ ਭਗਵਾਨ ਮੱਣੀ ਬੈਠਾ ਉਹ ਤਾਂ ਮੰਨ ਲੀਦਾ ਕਲ ਕੰ ਜੇਵਾ ਸੀ ਨੀ ਨਾਮ ਦੀ ਸਭ ਦੇ ਅੰਦਰ ਹੈ ਅਸੀਂ ਬੁੱਢੇ ਤੇਰੇ ਵੀ ਅੰਦਰ ਹੈ ਤੇ ਵੀ ਅੰਦਰ ਹੈ ਤੇਰੇ ਵੀ ਅੰਦਰ ਉਹਨਾਂ ਨੂੰ ਭਾਵੇਂ ਮੁਸਲਮਾਨ ਹੋਵੇ ਚਾਹੇ ਕੋਈ ਹੋਵੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਇਸਾਈਓ ਵੀ ਸਭ ਦੇ ਅੰਦਰ ਹੈ ਭਾਈ ਖੋਦੀ ਹੋਵੇ ਕੋਈ ਪਰਲਦਾ ਹੋਵੇ ਅਰ ਜਾਂ ਨੋਵੇ ਸਭ ਦੇ ਅੰਦਰ ਅਸੀਂ ਆਪਾਂ ਛੂਪ ਕੇ ਸਾਰੇ ਨਜ਼ਰ ਬੰਦੇ ਹਾਂ 83 ਲੱਖ ਜੋ ਚ ਬੰਦੇ ਉਹ ਵੀ ਬੰਦੇ ਜੀ ਸਾਰੇ ਸਭ ਦੇ ਅੰਦਰ ਤੇ ਆਪਾਂ ਉਹ ਤੇ ਇੱਕ ਮਤ ਹੋਈ ਉਹਦੀ ਗੋਲ ਤੇ ਹਾਂ ਆ ਭਿਜੜਾ ਮੜ ਕੇ ਵਿਜੜੀ ਕੀਤੇ ਸੀ ਕਮਾਤਾ ਉਹਨੂੰ ਬੋਲੋ ਉਹਨੂੰ ਪੁੱਛੋ ਉਹ ਤੇ ਬੰਦ ਹੋਰ ਜੀ ਬਾਕੀ ਆਪਣੀ ਆਪਣੀ ਥਰਸੋ। ਹਾਂ ਜੇ ਅਸੀ ਇੱਕ ਮਾਤਰਾ ਹੋਈ ਉਹਦੇ ਤੇ ਫਿਰ ਓਖਾ। ਜਿਹੜੀ ਮੁਸਲਮਾਨ ਕਹਿੰਦੇ ਸਾਨੂੰ ਓਖਾ। ਅਸੀਂ ਕਹਿੰਦੇ ਮੁਸਲਮਾਨ ਨੂੰ ਓਖਾ। ਜਿਹੜੀ ਕਾਮਨ ਗੱਲ ਆ ਸਾਡੀ ਸਾਰੇ ਬੰਦੇ ਉਹ ਕਾਮਨ ਪ੍ਰੋਗਰਾਮ ਪ੍ਰੋਗਰਾਮ ਲੈ ਕੇ। ਮਾਨੂੰ ਜੇ ਪ੍ਰਸਾਦ ਤੁਸੀਂ ਸਭ ਕੋ ਮੰਨੇਂ मुखता को जस रसन है जय प्रसाद कुछ सबको माने तू सबको माने कुत्ते तेरी है न लोग सारे कि हां वे हैगा कुछ शरीर दे विच मानते हैं काय रीना जी दोबारा मत देता है के लोग जीवात्मा देदे नहीं पर बांधते ने लोग तो, तो उ सबको माने तू तो होए ਉਹ ਜਲ ਕੋ ਮਰ ਮੁਖਤਾ ਕੋ ਜਸ ਰਸਨ ਬਖਾਨਾ ਹੈ ਤੇਰੀ ਹੋਦਰੋਂ ਦਾ ਮੰਤਰ ਵੀ ਤੇਰੀ ਹੋਂਦ ਹੈ ਸਰੀਰ ਕਰ ਸਰੀਰ ਇਹ ਸਬਦ ਕਰਦਾ ਹੋਂਦ ਨੂੰ ਸਰੀਰ ਤਾਂ ਸਬਦ ਕਰਦਾ ਹੋਂਦ ਤਾਂ ਹੁੰਦਾ ਨਹੀਂ ਮੁਖਤਾ ਜਸ ਰਸਨ ਬਖਾਨਾ ਜਾਹ ਕੋਈ ਵੀ ਜੀਸਾ ਮੇਰੇ ਨਾ ਹੋਵੇ ਜਿਸਰੀਰ ਕਰਕੇ ਹੀ ਰੋਣਾ ਪਿਆ ਆ ਵੀ ਹੈਗਾ ਜਾਂ ਨਹੀਂ ਹੈਗਾ ਹਾਂ ਸਰੀਰ ਕਰਕੇ ਹੀ ਦੱਸਿਆ ਜਾਊ ਹੈਗਾ ਨਹੀਂ ਹੈਗਾ ਮਾਦੀਕਾ ਬੁੱਤਲਾ ਕਿੱਥੇ ਲੱਜਦਾ ਪ੍ਰਗਟ ਵੀ ਹੈ ਬੋਲਦਾ ਤਾਂ ਪ੍ਰਗਟ ਹੈ ਚੁੱਪ ਕੀ ਤਾਂ ਰਗੁਪਤ ਹੈ ਸ਼ਬਦ ਰੂਪ ਦੇ ਵਿੱਚ ਪ੍ਰਗਟ ਹੈ ਚੁੱਪ ਕਰਿਆ ਜੋ ਅਧੁਰੂਪ ਚੁਪਤ ਹੈ ਗੁਪਤ ਪ੍ਰਗਟ ਹੋਏ ਬੈਸਾਂ ਲੋਗ ਉਹ ਪਾਓ ਸ਼ਬਦ ਰੂਪ ਵਿੱਚ ਪ੍ਰਗਟਾ ਜਾਂ ਬੋਲ ਦਾ ਜਨ ਪ੍ਰਗਟ ਹੁੰਦਾ ਉਹਨੇ ਗੋਪਤਾ ਮਰਿਆ ਹੋਇਆ ਫਿਰ ਉਹ ਸੋਨ ਸਮਾਜ ਤੋਂ ਮਰਿਆ ਨੂੰ ਕਹਿੰਦੇ ਨੇ ਸਾਹਿਬ ਨੂੰ ਝਾਏ ਤੇ ਪ੍ਰਗਟ ਕਰਦਾ ਪ੍ਰਮੇਸ਼ਰ ਨੇ ਵੀ ਪ੍ਰਗਟ ਛਾਏ ਤੇ ਵਿਚ ਹਿਤਾ ਰਚਨਾ ਸਾਰੀ ਰਚ ਕੇ ਰਚਨਾ ਰਚ ਕੇ ਕਹਿੰਦੇ ਨੇ ਮੈਂ ਆਪ ਪ੍ਰਮੇਸ਼ਰ ਹਾਂ ਉਹਨੇ ਰਚੀਏ ਜੀਵਨ ਦਾ ਫੇਰ ਵੀ ਨਹੀਂ ਜੀ ਬੰਦ ਤਾਂ ਹੈਗਾ ਨਾ ਜੇ ਪ੍ਰਸਾਦ ਕੁਝ ਸਭ ਕੋ ਮੰਨੇ ਕੁਝ ਸਭ ਕੋ ਮੰਨੇ ਮੁਖਤਾ ਕੋ ਜਸ ਰਸਨ ਬਖਾਨਾ ਮੁਖਤਾ ਕੋ ਜਸ ਰਸਨ ਬਖਾਨਾ ਉਹਦਾ ਜਿਹੜਾ ਜਸਾ ਮੁਖ ਤੋਂ ਉਜਾਲਾ ਦੇ ਦੇ ਬੂ ਤੋਂ ਤੇ ਅਸਲਵਾ ਕੋਈ ਐਸੀ ਸੰਗ ਸ਼ਰਮ ਤੋਂ ਦਿਦਕ ਸ਼ਰਮ ਕਉ ਜਖ ਕਰੀ ਜਿਹੜਾ ਸੁਪਰੀਮ ਹੋਵੇ ਸੁਪਰੀਮ ਚੋਣ ਦਬੀ ਸਰਕਾਰ ਨਹੀਂ ਬਣਨ ਦਿੰਦਾ ਉਹ ਖਤਾ ਕੋ ਜਸ ਰਸਨੋ ਬੁਖਾਉਂਦਾ ਹਾਂ ਅਦਾ ਸੁਣੋ ਤਾ ਕੋ ਅਕ ਜਾ ਕੋ ਤਾ ਕੋ ਤਾ ਕੋ ਹਾਂ ਮੇਰੇ ਯਾਦੋਂ ਮੈਂ ਰਹਿਤਾ ਧਰਮ ਮਨਨ ਸਦਾ ਭਾਇੇ ਕੇਵਲ ਪਾਰ ਬ੍ਰਹਮ ਜੇ ਪ੍ਰਸਾਦ ਤੇਰਾ ਰਹਿਤਾ ਸਰ ਜੀ ਕਿਰਪਾ ਨਾਲ ਤੇਰਾ ਰਹਿਤਾ ਬਚਿਆ ਹੋਇ ਜਿਹਦੇ ਕੁਰਬਾਨਾ ਤੇਰਾ ਧਰਮ ਬਚਾ ਲੇ। ਤੇ ਦੂ ਅਤਾਰ ਬੱਲੂ ਜਾਣ ਤੇ ਰੋਕਦਾ। ਹੋ ਰੋਕਦਾ। ਉਦਲਾ ਉਦਲਾ ਰੋਕਦਾ ਨਾ। ਜਿਆਦਾ ਗੁਰਾ ਕਮ ਕਰਨਾ ਨਹੀਂ ਕਰਦਾ। ਉਦੋਂ ਕਹਿੰਦਾ ਨਹੀਂ ਕਰਨਾ। ਇੱਥੇ ਆ ਕੇ ਥੋੜਾ ਜਿਹਾ ਵਿਸ਼ਾਦੀ ਦੇ ਦਿੱਤੀ ਕੌਣ ਹੈ। ਇੱਥੇ ਆ ਕੇ ਉਹਦਾ ਥੋੜਾ ਜਿਹਾ ਐਡਰੈਸ ਦੇਤਾ। ਹਾਂਜੀ। जय प्रसाद जी की गल गा मन सदा मन सदा पे आए पार ब्रह्म है केवल और ये सारा उठ पार ब्रह्म भी ले जाएगा जाएगा ਪਾਲ ਬ੍ਰਹਮਣਾ ਜੁੜ ਕੇ ਤਰਬਾਜ ਬਚੂਗਾ ਜਿਹੜਾ ਧਰਮ ਰਾਜ ਆਣਾ ਤੇ ਧਰਮ ਉਹਨੇ ਬਚਣਾ ਕਿ ਉਹਨੇ ਨਹੀਂ ਵਰਨਾ ਫਿਰ ਜਦ ਪਾਲ ਰੂਪ ਚ ਹੋਊਗਾ ਸ਼ਬਦ ਰੂਪ ਚ ਫੇਰ ਤਰਬ ਬਚੂਗਾ ਜਬਰਮੰਤੋ ਫੇਰ ਬਾਹਰ ਹੋਊਗਾ ਪ੍ਰਭ ਜੀ ਜਬ ਤੱਕ ਦਰਗਾਹ ਪਾਵੇ ਪ੍ਰਭ ਜੀ ਜਬ ਦਰਗਾਹ ਮਾਨ ਪਾਵੇ ਨਾਮਿਕ ਪਤ ਸੇਤੀ ਕਰ ਜਾਵੇ ਜਿਹੜਾ ਦਾ ਦਰਗਾਹ ਜਿਹੜੀ ਤਾਂ ਹਦਰਗਾ ਅੰਦਰ ਦੀ ਪ੍ਰਭ ਜੀ ਕੋਲ ਮੰਨ ਪਾਵੇ ਹੋਰ ਬ੍ਰਹਮ ਹੈ ਉਹਨੂੰ ਪ੍ਰਭ ਜੀ ਨੇ ਜਪਣਾ ਉਹ ਪ੍ਰਭ ਜੀ ਦਾ ਵਿਸ਼ਰ ਉਹਦੇ ਦਰਗਾਹ ਲਗੂਆ ਦਰਗੇ ਬਾਦ ਗਰਗਾ ਦਾ ਬੇ ਮਾਨ ਮੈਂ ਨਾ ਹਮ ਅਰੇ ਦਰਗਾਹ ਕਹਿਣੋ ਕੋ ਬੈਠਾ ਦਰਗਹ ਦੇ हां जी जबत ते दरगह मान पावे नानक पात सेती घर अप जावे नानक ने पात सेती अपनी इज्जत बचा के चले जाते और नारे आगे तो प्रभु जी जब ते ना पहलो दरगह उस है उसो बाद घर जाने दी गल होगी का बाद छे वो हो आओ घर है